ਹੁਣ ਅਗਲਾ ਉਪਦੇਸ਼ ਜਿਹੜਾ ਹੈ ਉਹ ਹੈਗਾ ਜੀ ਡੱਡੇ ਅਖਰ ਤੋਂ ਜੀ ਭਗਤ ਕਬੀਰ ਜੀ ਦਾ 19ਵੀਂ ਪੌੜੀ ਕੋੜੀ ਬਾਵਨ ਅਖਰੀ ਭਗਤ ਕਬੀਰ ਜੀਓ ਕੀ ਡੱਡੇ ਅੱਖਰ ਤੋਂ ਉਪਦੇਸ਼ ਹੈ ਜੀ ਡੱਡਾ ਡਰ ਉਪਜੇ ਡਰ ਜਾਈ ਤਾਂ ਡਰ ਮੈਂ ਡਰ ਰਹਾ ਸਮਾਈ ਜੇ ਕਹਿੰਦੇ ਡਰ ਤੇ ਅੰਦਰ ਪੈਦਾ ਹੋ ਜਵੇ ਕਿਹਦਾ ਹੁਕਮ ਦਾ ਹੁਕਮ ਦਾ ਵਿਰੋਧ ਕਰਦਾ ਹੈ ਉਹ ਤੋਂ ਹੁਕਮ ਦਾ ਵਿਰੋਧ ਕਰਨਾ ਪਾਪ ਹੈ ਜੇ ਇਹ ਤੇਰੇ ਅੰਦਰ ਡਰ ਪੈਦਾ ਹੋ ਜਾਏ ਹੁਕਮ ਦਾ ਵਿਰੋਧ ਪਾਪ ਹੈ ਤਾਂ ਜਿੰਨੇ ਦੁਨੀਆ ਦੇ ਹੋਰ ਡਰਦੇ ਨਾ ਸਾਰੇ ਇਸ ਡਰ ਦੇ ਵਿੱਚ ਸਮਾ ਜਾਣਗੇ ਫਿਰ ਤੈਨੂੰ ਕੋਈ ਡਰ ਪਨ ਪਾਪ ਦਾ ਰਹੂਗਾ ਹੀ ਨਹੀਂ ਜੇ ਹੁਕਮ ਦੇ ਵਿੱਚ ਤੈ ਸਭ ਕੁਝ ਮੰਨ ਲਿਆ ਵੀ ਹੁਕਮ ਦੇ ਵਿੱਚ ਹੀ ਰਹਿਣਾ ਹੁਕਮ ਦੇ ਵਿੱਚ ਹੀ ਰਹਿਣਾ ਹੁਕਮ ਜੋ ਕਰਾਉਂਦਾ ਉਹੀ ਕਰੇ ਫਿਰ ਤੈਨੂੰ ਕੋਈ ਡਰ ਨਹੀਂ ਇਹ ਡਰ ਦੇ ਵੱਡੇ ਡਰ ਸਾਰੇ ਡਰ ਸਮਾ ਜਾਣ ਤਾਂ ਡਰਵੇਂ ਡਰ ਰਹਿਆ ਹਰ ਪ੍ਰਕਾਰ ਦਾ ਨਾਲੇ ਜਿਸਮ ਆ ਜਾਂਦਾ ਕੋਈ ਡਰ ਦੀ ਲੋੜ ਨਹੀਂ ਫਿਰ ਹਾਂਜੀ ਪਹਿਲੇ ਡਰ ਨੂੰ ਮੁਕਤਾ ਕਰਿਆ ਹੋਇਆ ਨੇ ਉਹਨਾਂ ਨੇ ਮੁਕਤਾ ਨਹੀਂ ਚਾਹੀਦਾ ਸੀ ਇੱਕ ਵਜਨ ਚਾਹੀਦਾ ਉਹ ਡਰ ਔਂਕੜ ਵਾਲਾ ਚਾਹੀਦਾ ਧੂਆ ਡਰ ਮੁਕਤਾ ਚਾਹੀਦਾ ਉਲਟ ਕੀਤਾ ਹੋਇਆ ਡੱਡਾ ਡਰ ਜਿਹੜਾ ਹੈਗਾ ਇਹ ਔਂਕੜ ਵਾਲਾ ਚਾਹੀਦਾ ਡਰ ਜਾਈ ਜਿਹੜਾ ਬਹੁਵਚਨ ਆ ਮੁਕਤਾ ਚਾਹੀਦਾ ਹੈ ਜੀ ਹਾਂਜੀ ਹਾਂ ਠੀਕ ਹੈ ਜੀ ਜੋ ਡਰ ਡਰੈ ਤਾਂ ਫਿਰ ਡਰ ਲੱਗੈ ਨਿੱਡਰ ਹੂਆ ਉਰ ਹੋਈ ਭਾਗੇ ਫੇਰ ਡਰ ਕੇ ਮਰ ਜਾਂਦਾ ਜੇ ਕਬੀਰ ਨੂੰ ਆਤੀ ਮੂਹਰੇ ਸਿਰ ਦਾ ਡਰ ਜਾਂਦਾ ਨਾ ਜੇ ਨਾਮਦੇਵ ਨੂੰ ਆਤੀ ਅੱਗੇ ਪਾਸਤਾ ਮਨਾਉਂਦੇ ਡਰ ਜਾਂਦਾ ਕਹਿੰਦੇ ਫੇਰ ਡਰ ਫੇ ਚੰਬੜ ਜਾਂਦਾ ਜੇ ਡੇਡਰ ਹੋ ਜੇ ਉੱਤੇ ਵੀ ਪਾਣਾ ਮੰਨੇ ਵੀ ਜੋ ਹੋਣਾ ਜੰਮਣ ਬੰਨਾ ਹੁਕਮ ਹੈ ਨਹੀਂ ਸਕਦੇ ਮੈਂ ਲੋਜੇ ਮਾਰਨਾ ਤਾਂ ਮਰਨਾ ਹੁਣੇ ਮਰਨਾ ਤਾਂ ਬਚਾ ਨਹੀਂ ਸਕਦੇ ਇਹ ਪਾਣੇ ਦੇ ਬਿਨਾ ਮਾਰ ਨਹੀਂ ਸਕਦਾ ਪਾਣਾ ਜੇ ਬੰਨਾ ਤਾਂ ਬਚਾ ਨਹੀਂ ਸਕਦਾ ਲਾ ਆਪ ਤਾਂ ਮਾਰੇ ਕੌਣ یہ گل پل ہو جے لیڈر ہو جے ڈر اُڑو ہئی پاگا ہمیشہ واسطے ہمدرڈ نکل جاندے نہیں مار سکدا کوئی نہیں بچا سکدا کوئی ہاں جی اچھا جی نڈر ہوا ڈر اُڑ ہوے بھاگے ٹھیک ہے جی اُڑ ہوئی کی گلاں گلاں اچھا پرے سیاری نال لکھیا ਅੱਛਾ ਉਹ ਰਹੋ ਈ ਭੱਗ ਹੈ ਹਾਂ ਉਹ ਰਹੋ ਈ ਹਿਰਦੇ ਵਿੱਚੋਂ ਹੀ ਵੱਜਦਾ ਹੈ ਠੀਕ ਹੈ ਇਹ ਨਿਰਪੈ ਨਿਸ਼ਾਨੀ ਹੈ ਜੀ ਜੀ ਹੁਣ ਅਗਲਾ ਉਪਦੇਸ਼ ਹੈਗਾ ਜੀ ਗੁਰੂ ਨਾਨਕ ਸਾਹਿਬ ਦਾ ਆਸਾ ਮਹਲਾ ਪਹਿਲਾ ਪੱਟੀ ਚੋਂ 16ਵੀਂ ਪੌੜੀ ਦਾ ਉਪਦੇਸ਼ ਹੈ ਜੀ ਡੱਡੇ ਡੰਪ ਕਰੋ ਕਿਆ ਪ੍ਰਾਣੀ ਜੋ ਕਿਛ ਹੋਆ ਸੋ ਜੋ ਕੁਝ ਹੋਇਆ ਸਭ ਚੱਲਣਾ ਤੈਨੂੰ ਚਿੰਤਾ ਦੀ ਘੜੀ ਲੋੜ ਹੈ ਜੋ ਪਜੋਸੋ ਜੋ ਪੈਦਾ ਹੋਇਆ ਉਹ ਚੱਲਣਾ ਹੋਇਆ ਜਿਹਨੇ ਆਉਣਾ ਹੈ ਆਇਆ ਉਹਨੇ ਜਾਣਾ ਹੀ ਜਾਣਾ ਜੋ ਪੈਦਾ ਹੋਇਆ ਉਹਨੇ ਮਰਨਾ ਹੀ ਪੈਣਾ ਕੋਈ ਚਿੰਤਾ ਦੀ ਲੋੜ ਨਹੀਂ ਹੈ ਹਾਂ ਜਿਸ ਤਾਂ ਸੁਖ ਪਾਵੋ ਸ਼ਰਮ ਨਿਰੰਤਰ ਰਵ ਰਹਿਆ ਹਾਂ ਜੇ ਸੁਖ ਪਾਉਣਾ ਤਾਂ ਜਿਸ ਸਾਰੇ ਉਹਦੀ ਸੇਵਾ ਕਰ ਲੋ ਜੇ ਸਾਨੂੰ ਤੇ ਨਬਰੀ ਆ ਜਿਹੜਾ ਸਾਡੇ ਅੰਦਰ ਹੈ ਲਗਾਤਾਰ ਹਰ ਵਕਤ ਹਾਜ਼ਰ ਰਹਿੰਦਾ ਹੈ ਉਦੀ ਸੇਵਾ ਕਰ ਲੋ ਜੇ ਸੋ ਕੋਣ ਹੈ ਜੋ ਆਇਆ ਸੋ ਚਲਸੀ ਸਭ ਕੋਈ ਆਪਣੀ ਵਾਰੀ ਵਾਰੀ ਸੇ ਚਿਰ ਹੈਗੇ ਨਿਸ਼ਾ ਸੇਵਾ ਕਰ ਲੋ ਦੀ ਪੁੱਤਰ ਦੀ ਆਪਣੀ ਬੂੜ ਦੀ ਸੇਵਾ ਕਰ ਲੋ ਤੇ ਭਾੜੀ ਚੱਲੋ ਉਹਦੇ ਕਹਣੇ ਚੱਲੋ ਦੀ ਆਵਾਜ਼ ਦੇ ਅਨੁਸਾਰ ਜੀਵਨ ਜਿਓ ਕੁਰਬਾਨੀ ਦੇ ਅਨੁਸਾਰ ਜੀਵਨ ਜਿਓ ਬਸ ਜਿਹਦੇ ਸਾਹ ਨੇ ਇਹ ਲੇਖਾ علاوہ باقی ਠੀਕ ਹੈ ਜੋ ਹੋ ਉਹ ਜੋ ਕਰਨਾ ਹੋਈ ਹੁਣ ਹਾਂਜੀ ਗੁਰੂ ਅਮਰਦਾਸ ਜੀ ਵੱਲੋਂ ਕੋਈ ਉਪਦੇਸ਼ ਨਹੀਂ ਹੈ ਜੀ ਡੱਡੇ ਅੱਖਰ ਤੋਂ ਗੌੜੀ 52 ਅੱਖਰੀ ਮੰਨ ਲਾ ਹੈ ਜੀ ਪੌੜੀ ਪੌੜੀ ਨੰਬਰ 29 ਪੌੜੀ ਡੱਡਾ ਡੇਰਾ ਇਹ ਨਹੀਂ ਜਿਹ ਡੇਰਾ ਤਹ ਜਾਨ ਵਾ ਡੇਰਾ ਸੰਜਮੋ ਗੁਰ ਕੈ ਸ਼ਬਦੀ ਪਛਾਨ ਦਲਦਲ ਅਕਰ ਰੋਣੇ ਹੀ ਡੇਰਾ ਨਹੀਂ ਸੰਸਾ ਜਿਹੜਾ ਤੇ ਡੇਰਾ ਬਣਾ ਲਿਆ ਅਸਾਂ ਤਾਂ ਡੇਰੇ ਬਣਾਏ ਇਹਨੂੰ ਪੁੱਛ ਲਓ ਤੁਸੀਂ ਦੱਸਦੇ ਹੋ ਵੀ ਇਹ ਨਹੀਂ ਹੈ ਕਿਸੇ ਦਾ ਹੋਰ ਕਿ ਇੱਥੇ ਡੇਰਾ ਕੋਈ ਨਹੀਂ ਹੈ ਕਿਸੇ ਦਾ ਅਸਲੀ ਡੇਰਾ ਉਹਨੂੰ ਜਾਣ ਲਓ ਉੱਥੇ ਕਰ ਲਓ ਐਸਾ ਨਾ ਗੁਰਾਂ ਉੱਥੇ ਏਸੀ ਇੱਥੇ ਰਹਿਣ ਲੱਗੇ ਲਗਾਏ ਜੇ ਡੇਰਾ ਦਾ ਜਾਣ ਉਹ ਡੇਰੇ ਦਾ ਸਮਝੋ ਉਸ ਡੇਰੇ ਵਾਸਤੇ ਕੀ ਕਰਦੇ ਉਹ ਕਰਨ ਲੋ ਕੁਛ ਅਸੰਜੂ ਗੁਰ ਕਾ ਸ਼ਬਦ ਪਛਾਣ ਆ ਬਾਣੀ ਚੋਂ ਪਛਾਣ ਲੋ ਕੁਛ ਉਸ ਡੇਰੇ ਵਾਸਤੇ ਕੀ ਕਰਨ ਐਵੇਂ ਗਲਤ ਪਾਸੇ ਤੁਰੇ ਫਿਰਦੇ ਲੋ ਸਹੀ ਇਆਂ ਡੇਰਾ ਕੋ ਸ਼ਰਮ ਕਰ ਘਾਲੇ ਜਾ ਕਾ ਤਸੂ ਨਹੀਂ ਸੰਗ ਚੱਲੈ ਆ ਜਿੰਨੀ ਤੱਕ ਹਾਲਣਾ ਕਮਾਈ ਕੀਤੀ ਐ ਕੰਮ ਵੇਟ ਕੀਤੀ ਐ ਡੇਰੇ ਵਾਸਤੇ ਕੀ ਕੀੜੇ ਤੇ ਜਾ ਕਾ ਸਸੂ ਨਹੀਂ ਸੰਗ ਚੱਲਿਆ ਇੱਕ ਇਹਦਾ ਤਣਕੇ ਜਿੰਨੀ ਵੀ ਚੀਜ਼ ਤੇਰੇ ਨਾਲ ਨਹੀਂ ਜਾਣੀ ਇਥੋਂ ਦੀ ਸਮਝ ਨਹੀਂ ਕੁਛ ਵੀ ਜਾਣਾ ਇਥੋਂ ਨਾਲ ਤਸੂ ਜਨਾ ਵੀ ਤਣਕੇ ਜਿੰਨੀ ਜੀਜ਼ ਏ ਦੁਲਦੀ ਤੂੰ ਲਿਆ ਸਕਦਾ ਸਾਰੀ ਜ਼ਿੰਦਗੀ ਇਹਦੇ ਤੇ ਲਾਤੀ ਬਣ ਗਿਆ ਤੂੰ ਸੰਤ ਤੈਨੂੰ ਇੰਨੀ ਵੀ ਇਹ ਗੱਲ ਨਹੀਂ ਤੂੰ ਲੋਕਾਂ ਨੂੰ ਕੀ ਕਹ ਲੈਣੀ ਐ ਨੂੰ ਨਹੀਂ ਜਾਣਗਾ ਨਹੀਂ ਜੀ ਡੇਰਾ ਕੀ ਸੋਮਿਤ ਜਾਣਾ ਦ੍ਰਿਸ਼ਟੀ ਪੂਰਨ ਭਗਵਾਨ ਉਹ ਡੇਰੇ ਦਾ ਗਿਆਨ ਤਾਂ ਉਹ ਜਾਣਦਾ ਹੈ ਉਹ ਡੇਰੇ ਬਬਤ ਤਾਂ ਮਾਇਆ ਦੇ ਤੇ ਅੱਖ ਹੈ ਮਾਇਆ ਦੇ ਤੇ ਹੁੰਦੀ ਹੈ ਉਹਨਾਂ ਨੇ ਤਾਂ ਇੱਥੇ ਗੁਰਦੁਆਰਾ ਦਾ ਨਾਮ ਰੱਖ ਲਿਆ ਜੀ ਪਰਮੇਸ਼ਰ ਦਵਾਰ ਫਿਰ ਮਾਇਆ ਪਰਮੇਸ਼ਰ ਹੈ ਉਹਨਾਂ ਫਿਰ ਮਾਇਆ ਕਿਤੇ ਬਾਣੇ ਪ੍ਰਾਨੀ ਝੂਠ ਢੋਰੀ ਝੂਠ ਦੀ ਠੱਗੀ ਚਾਏ ਹੋਈ ਰਹੀ ਮਾਇਆ ਦੀ ਠੱਗੀ ਚਾਏ ਨੇ अपने ਆਪ ਦਾ ਠੱਗ ਬਣਦੇ ਨੇ ਆਪਣੇ ਆਪ ਠੱਗ ਬਣਿਆ ਨੇ ਪਰ ਠੱਗੀ ਮਾਇਆ ਦੀ ਚਾਹੇ ਨੇ ਉਹਨਾਂ ਨੂੰ 100 ਠੱਗ ਠੱਗਿਆ ਹੋਰ ਮਨਾਵਾ जी ਹੋਇਆ ਜੀ ਲੋ ਜੀ ਨਾ ਉਹ ਤਾਂ ਆਪ ਠੱਗੇ ਗਏ ਉਹਨਾਂ ਦਾ ਇਹ ਨਹੀਂ ਪਤਾ ਵੀ ਅਸੀਂ ਠੱਗੇ ਹੋਏ ਹਾਂ ਲੋ ਜੀ ਉਹਾਂ ਡੇਰਾ ਕੀ ਸੋਮਿਤ ਜਾਣੇ ਉਹ ਪੂਰਨ ਭਗਵਾਨ ਹੁੰਦਾ ਪੂਰਾ ਜਿਹੜਾ ਇੱਕਾ ਪੂਰਨ ਭਗਵਾਨ ਹੈ ਉਹ ਤੇ ਕੋਹ ਕਿਹਾ ਹੋਇਆ ਪੂਰਨ ਭਗਵਾਨ ਜਿਹੜਾ ਇੱਕਾ ਭਗਵਾਨ ਅੱਛਾ ਪਰ ਇੱਕ ਜਿਹੜਾ ਹੈਗਾ ਉਹ ਪੂਰਨ ਬ੍ਰਹਮ ਹੋਇਆ ਤੁਸੀਂ ਕਹਿੰਦੇ ਹੋ ਉੱਗਿਆ ਹੋਇਆ ਤਾਂ ਬ੍ਰਹਮ ਨਹੀਂ ਹੁੰਦਾ ਭਗਵਾਨ ਹੈ ਪੂਰਨ ਭਗਵਾਨ ਅੱਛਾ ਜਦੋਂ ਆਮ ਬ੍ਰਹਮ ਹੈ ਉਹ ਭਗਵਾਨ ਹੈ ਜਦੋਂ ਇਹ ਮਨ ਟਿਕੋਗੇ ਫਿਰ ਪੂਰਨ ਬ੍ਰਹਮ ਹੋ ਗਿਆ ਪੂਰਨ ਬ੍ਰਹਮ ਇੱਕਾ ਬੀਜ ਰੂਪ ਹੈ ਵਿਸ਼ਰੂਪ ਹੋਇਆ ਬੁਰਦੂਆਨ ਹੋ ਗਿਆ ਜਦੋਂ ਵਿਸ਼ਰੂਪ ਹੋਇਆ ਫਿਰ ਪਾਰਬ੍ਰਹਮ ਵੀ ਹੋ ਜਾਂਦਾ ਜੀ ਇਹ ਪਾਰਬ੍ਰਹਮ ਵੀ ਕੋਈ ਉਲਕੋ ਭਗਵਾਨ ਵੀ ਪਾਰਬ੍ਰਹਮ ਕੋਰਣ ਕਰਨ ਵਾਲਾ ਨਾ ਹੋ ਭਗਵਾਨ ਵਧਾਉਣ ਵਾਲਾ ਭਗਵਾਨ ਤਾਂ ਕ੍ਰਿਸ਼ਨ ਵੀ ਹੈ ਭਗਵਾਨ ਦਾ ਰਾਮਚੰਦਰ ਵੀ ਇਹ ਪੂਰਨ ਭਗਵਾਨ ਤਾਂ ਹੈ ਗੁਰਮੁਖ ਪੂਰਨ ਭਗਵਾਨ ਹੈ ਸੱਚੀ ਭਗਵਾਨ ਹੈ ਜਿਹੜਾ ਦੂਏ ਨੂੰ ਪੂਰਨ ਕਰ ਸਕਦਾ ਉਹ ਪੂਰਨ ਭਗਵਾਨ ਵਾਹ ਦੂਰ ਕੋ ਦਾ ਫਰਿਆ ਉਹ ਪਵਾਨ ਕੋ ਲੋ ਜੀ ਡੇਰਾ ਨਿਚਲ ਸੱਚ ਸਾਧ ਸੰਗ ਪਾਇਆ ਨਾਨਕ ਤੇਜਨ ਮਹਿ ਡੋਲਾਇਆ ਡੇਰਾ ਨਿਚਲ ਸੱਚ ਸਾਧ ਸੰਗ ਪਾਇਆ ਜਿਹੜਾ ਨਿਚਲ ਡੇਰਾ ਹੈ ਜਿਸੇ ਜਾ ਕੇ ਮਰ ਟਿਕ ਜਾਂਦਾ ਬਿਲਕੁਲ ਚੜਾਇਮਾਨ ਰਹਿੰਦਾ ਹੀ ਨਹੀਂ ਡੋਲ ਹੋ ਜਾਂਦਾ ਹਮੇਸ਼ਾ ਰਹਿਣ ਵਾਲਾ ਸਾਧ ਸੰਗ ਪਾਇਆ ਸਾਧੀ ਸੰਗਤ ਵਾਲੂ ਪ੍ਰਾਪਤੀ ਹੋਈ ਓਦੀ ਸਾਧੋ ਤੇ ਰਹਿੰਦਾ ਸੀ ਨਾਨਕ ਤੇਜਨ ਮੈਂ ਢੋਲਾਇਆ ਫੇਰ ਕਹਿੰਦੇ ਉਹ ਤਾਂ ਹੀ ਢੋਲੂ ਜੀ ਇੱਥੇ ਹੁਣ ਤਵੀ ਦਾ ਉਪਦੇਸ਼ ਦੀ ਸਮਾਪਤੀ ਹੈ ਜੀ ਕਬੀਰ ਸਾਹਿਬ ਤੋਂ ਗੱਲ ਸ਼ੁਰੂ ਹੋਈ ਸੀ ਉਹਨਾਂ ਨੇ ਕਿਹਾ ਸੀ ਕਿ ਡੱਡੇ ਦਾ ਉਪਦੇਸ਼ ਹੈ ਕਿ ਅੰਦਰੋਂ ਡਰ ਜੇ ਤੁਸੀਂ ਆਪਣਾ ਖਤਮ ਕਰਨਾ ਹੈ ਇੱਕ ਦਾ ਡਰ ਉਪਜੇ ਤਾਂ ਸਾਰੇ ਜਿਹੜੇ ਬਾਕੀ ਡਰ ਆ ਸਮਾਪਤ ਹੋ ਜਾਂਦੇ ਆ ਉਹ ਫਿਰ ਨਿਰਪੋ ਹੋ ਜਾਂਦਾ ਹੈ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਆਂ ਵੀ ਇਥੇ ਆਪਾਂ ਬਾਕੀ ਡੰਪ ਕਰਦੇ ਆਂ ਉਹਨਾਂ ਦਾ ਕੋਈ ਫਾਇਦਾ ਨਹੀਂ ਹੈ ਸੇਵਾ ਸਤਗੁਰ ਦੀ ਕਰੋ ਉਹ ਸਾਰਿਆਂ ਵਿੱਚ ਨਿਰੰਤਰ ਰਵਿਆ ਹੋਇਆ ਗੁਰੂ ਅਰਜਨ ਸਾਹਿਬ ਜੀ ਦੱਸ ਰਹੇ ਆਂ ਕਿ ਓ ਡੇਰਾ ਜਿੱਥੇ ਆਪਾਂ ਰਹਿਣਾ ਜਿਹੜਾ ਆਪਣਾ ਅਸਲੀ ਘਰ ਹੈ ਉੱਥੇ ਜਾਣ ਦਾ ਸੰਜਮ ਸਿੱਖੋ ਜੀ ਇੱਥੇ ਡਡੇ ਅੱਖਰ ਦੇ ਉਪਦੇਸ਼ ਦੀ ਸਮਾਪਤੀ ਹੈ ਜੀ ਜੀ